ਡੌਲਤ ਡੋਲਤ ਹੈ ਸਖੀ ਫਾਟੇ ਸ਼ਿੰਗਾਰ ਡੌਲਤ ਡੌਲਤ ਡੌਲਤ ਹੈ ਸਖੀ ਡੋਲਦੀ ਡੋਲਦੀ ਤੇ ਫਾਟੇ ਚੀਰ ਸ਼ਿੰਗਾਰ ਬੜੇ ਸਰੀਰ ਆ ਜਿਹੜੇ ਸ਼ਰਧਾਲੂ ਜੀ ਕੀਰਤੀ ਕੇ ਸਰੀਰ ਬੜੇ ਬਣੇ ਬੜੇ ਪ੍ਰਾਂਦੇ ਹੋ ਹੋ ਸਟੇਦੇ ਬੜੀ ਦਾ ਜੂਤਾਂ ਖੜਕਦੀ ਕੀਰਤੇ ਇਹ ਜਿਗਾਰੇ ਹੋਏ ਬੜੀ ਖਤਮ ਹੋਏ ਦੇ ਸੁਖਸਾਰ ਦੇ ਪਚਾ ਕੇ ਲਵ ਦੇ ਲਵ ਦੇ ਜਿੱਦਾਂ ਜ ਲਵਦੇ ਰਹੇ ਬਾਹਰ ਬਾਟੇ ਚੀਜ਼ ਸੁਧਾਰ ਹੂੰ ਹੂੰ ਤਾਂ ਪਰ ਡਰ ਗਿਆ ਸੁਖ ਲਈ ਉਹਨੂੰ ਹੂੰ ਪੈਰ ਵਿੱਚ ਸੋਗ ਰਹੀ ਹੈ ਕਿਤੇ ਸਾਰੇ ਬੰਤਾ ਪੈਜ ਪੈਜ ਰੱਖਦੇ ਨੇ ਹੂੰ ਹੂੰ ਉਹ ਤਾਂ ਇਹ ਨਾ ਟਾਈਨ ਕਿਹਾ ਤਾਂ ਇਹਦਾ ਅਰਦਾਸ ਹੋ ਜਵੇ ਸੋਗ ਨਹੀਂ ਜੇ ਬੰਦ ਤੇ ਭਗਤੀ ਦੀ ਹੋਣੀ ਸੋਗ ਨਹੀਂ ਹੈ ਇਹ ਮਤਲਬ ਹੈ ਤੂੰ ਇਹ ਕੰਮ ਕਰ ਨਹੀਂ ਸਕਦਾ ਸੋ ਨਹੀਂ ਇਹ ਬੀੜ ਨਾਲ ਮਿਲਦੀ ਨਾਲ ਉਹ ਪੈ ਤੇ ਬਿਨ ਬਖਤੀ ਨਹੀਂ ਹੋ ਸਕਦੀ ਪਰ ਬੇਚਰ ਦਾ ਦਿਲ ਦੀ ਬਦਿਓ ਉਹ ਕੁੰਡਾ ਨਾਲ ਦੀ ਬਦਿਆ ਦੀ ਧਾਰ ਇਸ ਵਿੱਚ ਹੋ ਗਈ ਪੂਰ ਦਾ ਪੂਰੇ ਨਾ ਸੁਖਿਆ ਪਰਵੇਸ਼ਰ ਦੇ ਪੈਸੇ ਦੀ ਗੱਲ ਦੱਸੀਓ ਨਹੀਂ। ਐਵੇਂ ਭਗਤਨ ਹੋਏ ਤੇਰੀ, ਕਿਹਦਾ ਲੋਕਾਂ ਨੂੰ ਪੈਰ ਰਖਾ ਰਹੇ ਆਪ? ਆਪੋ ਕੋ ਗੁੱਟ ਕਹਿੰਦਾ ਗੱਲ ਮੰਨੂ, ਆਪ ਆਖ ਬਲ ਦੀ ਤਿਆਰੀ ਹੋ ਜਿੱਤ ਰਹੇ। ਆਪਣੇ ਕਰ ਆਪਣੇ ਢੀਤੀ ਕੰਤ ਸੁਜਾਨ, ਦਰ ਰੱਖਿਆ ਗੁਰ ਆਪਣੇ ਨਿਰਪੋ ਨਾਮ ਬਖਾਨ। ਦਰਬੰਉਈ ਜੇ ਦਰਬੰਲਿਆ ਹੁਕਮ ਦਾ ਜੇ ਦਾਲ ਨਾਵੇ ਮਦਗੀ ਦਰਬੂਈ ਖੜਾ ਪਰੇ ਸ੍ਰੀ ਕੰਤ ਸਜਾਨ ਜਿਨੇ ਕੰਤ ਸਜਾਨ ਤੇ ਦਲਰਣ ਆਪਣੀ ਵਰਜੀ ਸ਼ਕਤੀ ਜਿਦੇ ਸ੍ਰੀ ਕੰਤ ਸਜਾਨ ਮੇ ਸਜਾਨ ਦੇ ਦੇਖ ਲਈ ਦਰੱਖਿਆ ਗੁਰ ਆਪਣਾ ਨਿਰਪੋ ਨਾਮ ਵਖਾਣ। ਦਾਦਾ ਕਹਿ ਗੋਰਾ ਪਿੰਡ ਆਪਣੀ ਗੁਰਦਾ ਜਿਹਨੇ ਢਾਲਾ ਕੇ ਨਿਰਪੋ ਹੋ ਕੇ ਲੋਕ ਖਾਂਦ ਕੀਤਾ ਉਹਨਾਂ ਡਰ ਕੇ ਦੇਖ ਲਈ। ਅੱਛਾ ਜੀ। ਰੋਦਾ ਭੈ ਦੂਰ ਕਰਤਾ। ਹੂੰ। ਤੇਰੇ ਨੂੰ ਨਾ ਬਦੇ ਤਾਂ ਬੁਲਾਇਆ ਤੂੰ ਬੋਲ ਹੁਣ। ਫਿਰ ਉਹਤੇ ਹੀ ਵਿਆਖਿਆ ਬਖਿਆਨ ਕਰਵਾਇਆ ਸਭਾ ਅੱਛਾ ਜੀ ਉਹਨੂੰ ਇੱਜ਼ਤ ਦਿੱਤੀ ਹੈ ਆਪ ਨਹੀਂ ਬੋਲੇ ਆ ਫਿਰ ਤੂੰ ਬੋਲ ਸਿਰ ਕਰਤਾ ਸਿਰ ਹੋ ਕੇ ਬੋਲ ਠੀਕ ਹੈ ਸਭੋ ਡੰਡ ਵਾਲੀ ਤੂੰ ਸਿਰ ਪੈ ਕਰਤਾ ਹੂੰ ਸੱਚ ਤੋਂ ਡੰਡ ਵਾਲਾ ਸਿਰ ਹੁੰਦਾ ਝੂਠ ਤੋਂ ਡਰਦਾ ਨਹੀਂ ਹੁੰਦਾ ਠੀਕ ਹੈ ਦਾ ਡਰ ਹੁੰਦਾ ਨਹੀਂ ਝੂਠ ਤੋਂ ਡਰਦੀ ਉਹਨੂੰ ਲੋੜ ਨਹੀਂ ਹੈ हां जी वास तिखा कणी जब देखा नहीं दूर तिखा निवारी शब्द मन अमृत पिया भरपूर ऊपर वाड तिखा आ लो भी मुश्किल है बोलते हैं मुश्किल होते तक ठीक है दिकले। दिकले। दिकले। दिकले। दिकले। चलो बोल लेते है पास छल्ले है ऊपर चढ़ के जाने पानी बहुत ऊंचा है ਹਾਂ ਜਦ ਦੇਖਾ ਨਹੀਂ ਦੂਰ ਜਦ ਦੇਖਿਆ ਦੂਰ ਹੈ ਹੋ ਗਿਆ ਆਪੇ ਆ ਗਿਆ ਹਾਂ ਹਾਂ ਇਹ ਤਾਂ ਦੂਰ ਸੀ ਪਰ ਬਰਸ ਕੇ ਜਦ ਕੜੀਆਂ ਨਿਕਲਣ ਲੱਗੀਆਂ ਫਿਰ ਆਪੇ ਨੇੜੇ ਆ ਗਿਆ ਠੀਕ ਹੈ ਜੀ ਇਕਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਇਕਾ ਨਿਵਾਰੀ ਸ਼ਬਦ ਮਨ ਤੇ ਕਹਾ ਤਾਂ ਬਰਗੀ ਦਵਾਦੀ ਗਈ ਸ਼ਬਦ ਨੂੰ ਬਦਲ ਨਾਲੇ ਇਹ ਸ਼ਬਦ ਮਨ ਲੈਣਾ ਗੁਰੂ ਉਪਦੇਸ਼ ਮੰਨਦੇ ਤੇ ਕਹਾ ਤਾਂ ਜੈਦੇ ਹੀ ਰਹੀ ਅੱਛਾ ਜੀ ਜਬ ਹੋਈ ਪਰ ਅਪਤ ਪੀਆ ਭਰਪੂਰ ਪਰ ਗਿਆਨ ਦਾ ਭਰਪੂਰ ਅਬਰਤ ਕੀਤਾ ਜੇ ਸੁਝਾਈ ਤਾਂ ਬਰਪੂਰ ਕੀਤਾ ਪਹਿਲਾ ਬੁਧਿਆ ਫਿਰ ਸੁਧਿਆ ਸਮਝੇ ਨਾਲ ਕੀਤਾ ਭਰਪੂਰ ਹੋ ਕੇ ਲੁੱਧ ਹੋ ਕੇ ਪਰ ਕੇ ਪੂਰਾ ਗੱਲਿਆ ਤੇ ਲੋਕ ਦਾ ਗਿਆਨ ਕੋਈ ਕਵੀ ਨਹੀਂ ਰਹੀ ਆਨੰਦ ਹੋ ਕੇ ਛਕ ਲਿਆ ਦੇਹ ਦੇ ਆਖੇ ਸਭ ਕੋਈ ਜੈ ਭਾਵੇਂ ਤੈ ਦੇ ਗੁਰੂ ਦੇ ਦੇ ਆਕੈਸਬ ਕੋਏ ਸਾਦੇ ਦੁੱਧ ਨੇ ਦੇ ਦੇ ਕੈ ਭਾ beta ਦੇ ਨੂੰ ਚੰਦਰ ਉਹ اندر ਮੱਦੀ ਨੂੰ ਖੱਖਾ ਲਾਂਦਿਓ ਨੂੰ ਨੰਦਾਂ ਲੋਭ ਦੀ ਖੱਖਾ ਦੀ ਉੱਟੋ ਤੋਂ ਕੈਨੇ ਦੇ ਦੇ ਅਦਰੋ ਕੋ ਜੋਰ ਬੁੱਧ ਦੇ ਦੇ ਕੈ ਭਾਵੇ ਤੈ ਦੇ ਗੁਰੂ ਦਵਾਰੇ ਦੇਵਸੀ ਟਿਖਾ ਹਾਂ ਦਿੰਦਾ ਕਿੱਥੇ ਹੈ ਹੂੰ ਦੁਨਦ ਤੇ ਤਾਂ ਕਿਤੇ ਹੋਰ ਗੜੇ ਨਹੀਂ ਮਿਲਦਾ ਕਿਤੇ ਹੋਰ ਗੁਰੂ ਦੁਆਰੇ ਦੇਸੀ ਗੁਰੂ ਆਪਣੇ ਦੁਆਰੇ ਤੇ ਦਿੰਦਾ ਹੈ ਜਾਓ ਉੱਥੇ ਗੁਰੂ ਦੇ ਦੁਆਰੇ ਲੈ ਲਓ ਵਰਤਦਾ ਗੁਰੂ ਆਪਣੇ ਕੋਲ ਜਿਹੜਾ ਉਹ ਦੁਆਰੇ ਤੇ ਆ ਜਾ ਉਹ ਦਿੰਦਾ ਹੈ ਹੂੰ ਤੇੰਤੀ ਟਿਕਾਲਵਾਰੇ ਤੇ ਉੱਥੇ ਚੱਲਿਆ ਜਾਊਗਾ ਹਮਮ ਦਰਬਾਰ ਦੇ ਵਿੱਚ ਉਹੀ ਤੇ ਖਾਨ ਹਮਮ ਪੀਲੂ ਕਾ ਤੇ ਖਾਨ ਉਹੀ ਤੇ ਖਾਨ ਨਾਲ ਬਾੜ ਹੁਜੂ ਬਾਹਰ ਹੁੰਦਾ ਹੈ ਹਮ ਬਾਹਰ ਕਿਤੇ ਰਣ ਦੇ ਕੋਈ ਫਰਕ ਪੁੱਦਾ ਠੀਕ ਹੈ ਜੀ